पार ਜਾਂਦੇ हर को नाम ਕਾਮ ਤਾਨ ਤੈਨ ਹਰ ਹਰ ਗੁਰ ਦਾ ਦੇਖੋ ਪਾਰ ਜਾਂਦੇ ਜਿਹੜਾ ਫਿਰਸ਼ਾ ਹੈ ਉਹ ਕੁਝ ਨਹੀਂ ਹੁੰਦਾ ਕੋਈ ਵਿੱਚ ਪਾਰ ਜਾਂਦੀ ਸਭ ਝੂਠ ਹੈ ਇਹ ਜਿਹੜਾ ਹਰ ਕੋ ਨਾਮ ਹੈ ਇਹ ਪਾਰ ਜਾਂਦਾ ਕਿਉਂਕਿ ਪਾਰ ਲੈ ਜਾਂਦਾ पार ਪਾਰ है ਪਾਰ ਪਹੁੰਚਣਾ ਨਾਮ ਜਹਾਜ ਹੈ ਪਾਰ ਜਾਂਦਾ ਹੈ 파좌 रुख की करता ਬਈ ਐਨਾ ਉੱਚਾ ਵੀ ਜੀ ਤੇ ਚੜ ਕੇ ਪਰੇ ਚਲੇ ਗਿਆ ਮਾਇਆ ਤੋਂ ਪਰੇ ਚਲੇ ਗਿਆ ਦਾ ਇਦਾਂ ਬੜਾ ਉਰਖ ਹੋਵੇ ਕੋਈ ਸਿੱਧੇ ਪਾਰ ਜਾਦ ਬੋਪੀ ਲਾਇਆ ਤਾਂ ਆਪ ਕੀਤੇ ਸੀ ਪਾਰ ਜਾਦੇ ਉੱਥੇ ਆਪਨੇ ਹੀ ਕੀਤੇ ਹਨ द्रौपदी ਉਹਦਾ ਵੀ ਪਾਰ ਜਾ ਤੇ ਕੀਤਾ ਹੋਇਆ ਉੱਥੇ ਜੋ ਪਾਰ ਜਾਣ ਦੀ ਸਬਰਤਾ ਇਡਾਲ ਨਫਾ ਬਾਂਸ ਜਿਹੜਾ ਸਰਹੜ ਤੱਕ ਚਲੋ ਕੰਮ ਕਮ ਆਇਆ ਦੀ ਹੱਦ ਤੱਕ ਪਾੜੇ ਦਵੇ ਜਿਹੜਾ ਅੰਬਰ ਹੈ ਜੇ ਸਿਛੇਦ ਕਰ ਦੋਵੇ ਤਾਂ ਕੀ ਕਰ ਲੋ ਪਾਲੇ ਪਾਸੇ ਤਾਂ ਹੈ ਹੋ ਗੇ ਸ਼ਾਂਤਾ ਵੇਡਾ ਬਣਾ ਸਕਦੇ ਨੇ ਇਹ ਬਣਾ ਜਾ ਹਾਂਜੀ ਕਾਮ ਤੇਲ ਹਰ ਹਰ ਗੁਣ ਗਾਵੋ ਯਾਰ ਸਾਹ ਦੇ ਚੜ ਕੇ ਬਾਹਰ ਚਲੇ ਜਾਇਆ ਕਰ ਹਾਂਜੀ ਕਾਮ ਤੇਲ ਹਰ ਹਰ ਗੁਣ ਗਾਵੋ ਜਿਹੜੀ ਆ ਉਹ ਹਰ ਗੁਣ ਗਾਉਣਾ ਇਹ ਮੱਤ ਜਿਹੜੀ ਗੁਰਮੱਤ ਹੈ ਕਾਮ ਤੇ ਦੂਹਾ ਗਊ ਇਹ ਦੁੱਧੀ ਆ ਇਹਦੇ ਚ ਦੁੱਧੀ ਚ ਤੱਤਾ ਹੈ ਇਹਨੂੰ ਕਾਮ ਤੇ ਨੂੰ ਕਿਆ ਜਿਹੜਾ काम ਆਏ ਹੋਏ ਆ ਉਹਦੀ ਸਿੱਧੀ ਉਹਦੀ ਪੂਰਤੀ ਇਹ ਗੁਰਮਤ ਨਹੀਂ ਕਰਨੀ ਆ ਕੌ ਤੈਨੂੰ ਤਾਂ ਕਹਿਦਣਾ ਪਹਿਲਾਂ ਕਪਲ ਗਾਇ ਸੀ ਹਾਂ ਪਹਿਲਾਂ ਕਪਲ ਗਾਇ ਸੀ ਹਾਂ ਹਾਉ ਦਾ ਕਪਲ ਉਹ ਉਹ ਦੌਰਨ ਕਰਦੇ ਸੀ ਉਹ ਉਹ ਜਿਹੜੇ ਜਿਹਨਾਂ ਸੂਰਜ ਦੇ ਕੈਮਰਾ ਚੁੱਕੀ ਆ ਹਾਂ ਸਾਡਾ ਯਾਦ ਰੱਖ ਵੀ ਉੱਥੋਂ ਨਿਕਰੇ ਨਹੀਂ ਇਹ ਜੁੱਦਾ ਚ ਕੋਈ ਹੁਣ ਨਿਕਲਦੇ ਹੁਣ ਤਾਂ ਰਿਕਰ ਅੰਡਰ ਕੱਢੂ ਸਾਡੇ ਕੋਲ ਜਾਂ ਤਾਂ ਹਾਂ ਸਾਨੂੰ ਰੋਸ ਦੇ ਅਸ ਬਦਰ ਮੋਟੇ ਮੋਟੇ ਦੇ ਲੜਕਿਆ ਰੋਤਾ ਤੇ ਜਹਾਜ ਚੱਲਦੇ ਨੇ ਬਾਹਰ ਦੇ ਹਰ ਕੋਨਾ ਵਿੱਚ ਕਾਮ ਤੇਨ ਹਰ ਹਰ ਕੋਨਾ ਵਿੱਚ ਕਾਮ ਤੇਨ ਹਰ ਹਰ ਕੋਨਾ ਵਿੱਚ ਤੇ ਕਾਮ ਕਾਮ ਤੇਨ ਸਭ ਤੇ ਉੱਤਮ ਸਭ ਤੇ ਉੱਤਮ ਹਰ ਕਥਾ ਨਾਮ ਸੁਣ ਕੇ ਦਰਦ ਦੁੱਖ ਲੱਗਦਾ ਸਭ ਦੇ ਉੱਤਮ ਹਰ ਕਥਾ ਹਰ ਕਿਰਕਾ ਦਾ ਸਭ ਤੋਂ ਉੱਤਮ ਹੁੰਦੀ ਹੈ ਕਿਉਂਕਿ ਉਹ ਉੱਤਮ ਇਸ ਕਰਕੇ ਹੈ ਕਿ ਪਾਜਾਤ ਦੋ ਚੀਜ਼ਾਂ ਬਹੁਤ ਹੀ ਕੀਮਤੀ ਸਰਮੁਨੀ ਦੁਨੀਆ ਚ ਪਾਜਾਤ ਅਰਥੰਤ ਨੂੰ ਬਹੁਤ ਹੀ ਕ੍ਰਾਫਤ ਹੈ ਕਾਮਦੇ ਨੂੰ ਬੋਲ ਤੁਸੀਂ ਕਹਿੰਦੇ ਨਾ ਕਿ ਦੁਨੀਆ ਦਾ ਕੋਈ ਵੀ ਪਦਾਰਥ ਜੀ ਕੋਈ ਵੀ ਉੱਤੇ ਨੇ ਹਾਂ ਪਾਜਾਤ ਕਲਪ ਰਿਸ਼ਾ ਕਾਮਦੇ ਨੂੰ ਉਹ ਖਾਣੇ ਪੀਣ ਦੇ ਪਦਾਰਥ ਕਲਪ ਰਿਸ਼ਾ ਜੋ ਚੀਜ਼ ਕਲਪਨਾ ਕਰੋ ਥੱਲੇ ਉਹ ਹੀ ਵਿਆਣੀ ਮਿਲ ਮਤਲਬ ਕਲਪਨਾ ਨੂੰ ਪ੍ਰਦਾਨ ਬਣਾ ਦਿੱਤਾ ਕਾਲ ਪ੍ਰਦਾਨ ਬਣਾ ਦਿੱਤਾ ਸਿਰ ਤੇ ਚੜ੍ਹਤਾ ਤੁਹਾਡੇ ਅਜੀ ਮਨ ਗੱਲਿਆਂ ਵੀ ਕਾਲ ਹੈ ਉਹ ਕਹਿੰਦੇ ਗੱਲਪਣਾ ਕਰ ਨੂੰ ਮਜਾ ਛੱਡਿਆ ਸੀ ਜਿੰਜੀ ਕਾਲ ਹੈ ਜੇ ਕੋ ਕਾਲ ਆਇਆ ਹੈ ਇੰਦਰਗੋੜ ਦੱਸਿਆ ਪਾਲ ਚੰਡੀ ਆਉਂਦੀਆਂ ਨਾ ਚੰਡੀ ਜਦ ਚੰਡੀ ਆਉਂਦੀ ਹੈ ਚੰਡੀ ਦਾ ਮੂਰਤ ਸਾਡੀ ਘਰ ਦਾ ਇਹ ਸੇਵ ਜੀ ਸ਼ੇਵ ਚੰਡੀ ਦਾ ਗੱਲ ਨਹੀਂ ਕਰਦਾ ਕਦੇ ਦੇਖਿਆ ਦਿਖਾਇਆ ਹੋਇਆ ਕਾਲੀ ਦਾ ਗੱਲ ਨਹੀਂ ਹਾਂ ਕਾਲੀ ਦਾ ਕਾਲੀ ਦਾ ਬਿਟ ਆਇਆ ਦਿਖਾਇਆ ਮੁਰਗੇ ਫੜਦੇ ਨੇ ਉਹਨਾਂ ਨੇ ਕੰਜਰਾਂ ਨੂੰ ਰੱਖੀ ਮੈਂ ਕਿਹਾ ਵੀ ਹੁਣ ਉਹ ਦੂਰੋਂ ਦੀ ਨਾਲ ਜੀ ਥੱਲੇ ਕੀ ਹੈ ਪਤਾ ਦਿਖਾਈਆ ਮਾਈ ਘਰ ਤੁਸੀਂ ਆ ਦਸੋ ਬੂਰਖੋ ਆਦਮੀ ਫੋਟੋ ਕਦਰ ਰੱਖੀ ਜਿੱਦੋ ਗੱਲ ਪਾਣਾ ਨੇ ਸ਼ਿਵਜੀਤ ਪੈਰਾਂ ਤੇ ਰੱਖਿਆ ਰਹੇ ਕਲੀ ਕਾਲੇ ਦੀ ਫੋਟੋ ਹੈ ਨਾ ਰਖਾ ਦੇ ਫਿਰ ਉਹਨਾਂ ਹੋਏ ਕੰਨ ਸਾਥ ਤੇ ਨਹੀਂ ਕੀਏ ਤਾਂ ਸ਼ਿਵਜੀ ਤਾਂ ਕਾਲੀ ਤਾਂ ਦੁਨੀਆਂ ਨੂੰ ਵੜਦੀ ਫਿਰਦੀ ਸੀ ਸ਼ਿਵਜੀ ਮੂਰੇ ਨਹੀਂ ਨਾਣਾਕ ਉਹ ਬੱਜੇ ਨੂੰ ਨਾਨਕ ਦੇੰਪੂ ਦਾ ਤਨੀਏ ਬੋਲ ਲੈ ਜਿਹੜੇ। ਠੀਕ ਪਹਿਲੇ ਜਿਹੜੇ ਸੀ। ਜਦੋਂ ਨਾਨਕ ਦੇ ਗਾਹਾਂ ਚੇਲੇ ਬੋਲਣ ਲੱਗੇ ਨਾ ਉਹੀ ਗੱਲ। ਉਹ ਕਾਲੀ ਕਹਿਦ ਨੂੰ। ਅੱਛਾ। ਆਹੋ। ਨਾਨਕ ਦੇ ਮੱਥੇ ਜਿਹੜੀ ਸੀ ਉਹ ਤਾਂ ਕਹਿਆ ਵੀ ਦੁਰਗਾ ਨਹੀਂ ਆਇਆ ਤਾਂ ਤੁਰਨਗੇ ਤਾਂ ਕਹਿਦਾ ਕਿਲਾ ਹੈ ਦੀ। ਪਰ ਵੀ ਲੈਣਾ ਤਾਂ ਮਹਾਂਦੀ ਪੂਜਾ ਕਰਦਾ ਸੀ ਪਹਿਲਾਂ ਹਾਂ ਹਾਂ ਉਹਨੇ ਬਣਾਇਆ ਉਹਨੇ ਸਰਤੀ ਉਹ ਕਾਲੀ ਦਾ ਰੂਪ ਲਿਆ ਜਦ ਉਹਦਾ ਕਾਸ਼ੀ ਨਾ ਫਿਰਦਾ ਲੈ ਕਾਲੀ ਦਾ ਇਹ ਦੱਸ ਲੈ ਉੱਥੇ ਨੂੰ ਹੁੰਦਾ ਵੀ ਇਹ ਕੋਈ ਸ਼ਾਇਦ ਗੱਲ ਟੱਟਾ ਹੈ ਕਾਲੀ ਨੂੰ ਤਾਂ ਕਹਿੰਦਾ ਉਹ ਜਿਹੜੀ ਆ ਮਤ ਹੁੰਦੀਆਂ ਨੇ ਜਦੂਲ ਬਤ ਇਹ ਤਾਂ ਗਾਂ ਚੱਡੀ ਵੱਡੀ ਹੁੰਦੀਆਂ ਉਹਨੂੰ ਕਾਲੀ ਕਹਿੰਦੇ ਨੇ ਫਿਰ ਪੁਰਬਾ ਨੂੰ ਉਹ ਨਹੀਂ ਬੰਦ। ਇਹ ਮੁਕਤੀ ਦੀ ਉਹ ਗੱਲ ਕਰਦੀ ਹੈ ਖਾਲੀ। ਪਰ ਸ਼ਿਵ ਜੀ ਮੁਕਤੀ ਦੁਖਦਾ। ਤੇ ਮੁਕਤੀ ਦੇ ਪ੍ਰਚਾਰ ਦੇ ਰਾਹ ਦੇ ਵਿੱਚ ਰੋੜਾ ਸ਼ਿਵ ਜੀ ਹੋ ਤਾਂ ਹੀ ਗੰਧਨਮ ਗੱਪ ਉਹ ਆਣਾ ਆਪਣੇ ਉਹਦੇ ਵਿੱਚ ਜੋ ਗਏ ਚ ਫਿਕਮਦਾ ਨਹੀਂ ਚਾਹੀਦੀ ਸੰਸਾਰ ਚ। ਤਾਂ ਸਾਰੇ ਮੁਕਤ ਹੋ ਜਾਣਗੇ। ਨਾਰਦ ਤੇ ਤਾਹੀ ਖਲਾਬ ਸ਼ਿਕਾਇਤ ਹੈ ਕਿ ਨਾਦਵਾ ਮੁਰਤੀ ਜਲਾਦੋਂ ਤਾਂ ਸਾਰਿਆਂ ਨੂੰ ਅਜੀ ਇਹ ਤੇ ਵਾਗ ਰੱਖਣੇ ਲੋਕ ਇਹ ਪਿਛਲੇ ਗ੍ਰੰਥਾਂ ਨੂੰ ਜੇ ਮਤਲਬ ਹੈ ਕੰਪੈਰੀਟਿਵ ਸਟੱਡੀ ਕਰੀਏ ਨਾ ਨਹੀਂ ਸਿਰਫ ਪਤਾ ਲੱਗਦਾ ਵੀ ਗੱਲ ਕੀ ਅਸਰ ਦੇ ਵਿੱਚ ਹੈ ਉਹਦਾ ਕਰਨ ਨਹੀਂ ਦਿੰਦੇ ਗੱਲ ਵਿਚਾਰ ਨਹੀਂ ਦਿੰਦੇ ਨਾ ਸਦਾ ਸਿੱਟਾ ਕੀ ਨਿਕਲੇ ਇਹੜੀਆਂ ਚੀਜ਼ਾਂ ਨੇ ਤਾਂ ਸਾਡੇ ਰਿਕਾਰਡ ਚ ਇਹਨਾਂ ਜੋ ਲਪੜਾਂ ਕੀ ਆ ਆਪਣੀ ਖੋਜ ਕੀ ਕਰ ਦਿੱਤੀ ਤੱਥੋਂ ਦੀ ਖੋਜ ਕਰ ਉਹੀ ਤਾਂ ਸਾਡੇ ਫੜਾਏ ਹੋਏ ਨੇ ਰਕਾਰ के ਤੇ ਕੌਤਨ ਤਾਂ ਜੇਕਰ ਆ ਗਿਆ ਤੇ ਇਹ ਤੇ ਕੌਤਨ ਹੋਰ ਬਣੀ ਹੋਈ ਹੈ ਤੇ ਪਾਰਜਾਤ ਆ ਗਿਆ ਇਹਦੇ ਖਾਤੇ ਇੱਕ ਹੋਰ ਬਣੀ ਹੋਈ ਹੈ ਉਹ ਜਿਹੜਾ ਇਹਦਾ ਹੈਗਾ ਸਾਸਰ ਬਾਹੂ ਇਹਦਾ ਜਦ ਤੱਕ ਉਹ ਸਾਧੂ ਬੇਰਕਾ ਦਾ ਘਰ ਵਾਲਾ ਉਹ ਬੱਧਦੀ ਕਹਾਣੀ ਹੋਏ ਹੈ। ਕੋ ਦਾ ਸਤਰਾਣੀਆਂ ਅਸੀਂ ਆਂ ਕੁੜੀਆਂ ਅਸੀਂ ਆ ਰਾਜੇ ਦੇ ਇੱਕ ਰਿਸ਼ੀ ਨੂੰ ਵਿਆਹਤੀ ਬੜੀ ਛੇ ਵਿਆਹਤੀਆਂ ਰਾਜਾ ਨੂੰ ਉਹ ਰਾਜਾ ਆਇਆ ਸੀ ਉਹਦੇ ਇਹ ਜਾਂਦੇ ਸੀ ਉਹਨਾਂ ਦੇ ਵੇਰਗਾ ਆਪਣੋ ਜਗਨਗਰ ਨਾਲ ਚੱਲ ਜਾਂਦਾ ਸੀ ਉਹ ਕਹਿੰਦਾ ਸੀ ਸਾਡੇ ਵੀ ਆਇਓ ਉਹ ਕਹਿੰਦਾ ਥੋੜੇ ਅਸੀਂ ਕਿਵੇਂ ਆ ਜੀਏ ਤੁਸੀਂ ਤਾਂ ਇੱਕ ਛੋਟੇ ਜਿਹੇ ਘੜੇ ਤੇ ਰਹਿੰਦੇ ਹੋ ਸਾਡੇ ਜਿੱਥੇ ਅਸੀਂ ਜਾਂਦੇ ਖੋਜਾਂ ਨਾਲ ਜਾਂਦੀਆਂ ਨੇ ਐਨੇ ਸਾਡੇ ਘੋੜੇ ਹਾਥੀ ਆਪ ਸਭਾਵੇਂ ਨਾ ਉੱਥੇ ਭਾਈ ਤੁਹਾਡੇ ਇਹ ਉੱਥੇ ਰਾਖਣ ਕਰਦੇ ਜਦੋਂ ਨਹੀਂ ਬਾਹਰ ਜਾਣਾ ਪਊ ਗੱਲ ਕਹਿਤੀ ਇਥੋਂ ਉਹਨੇ ਕਹਿ ਦੇ ਰਿਸਕੇ ਦਸਤਾ ਆਪਣੇ ਜਬਦਗਰ ਨੂੰ ਕਹਿਣਾ ਵੀ ਸਾਰਿਆਂ ਨੂੰ ਝੋਦਾ ਦੇਣੀ ਕੋਈ ਸੁਵਾਗਮ ਨੱਖ ਲਿਆ ਫਿਰ ਉਹ ਕੰਮ ਅਤੇ ਦੋਵਰੋ ਪਾਜਾ ਦਾ ਰੁੱਖ ਲੈ ਗਿਆ ਇਹ ਸਾਖੀ ਬਣਾਈ ਹੋਈ ਆ ਕੁਟਿਆ ਚ ਸਭ ਕੁਝ ਕੱਢੀ ਗਈ ਦੇਖਿਆ ਵੀ ਇਹ ਕੀ ਗੱਲ ਕੋਈ ਹਲਵਾਈ ਨਹੀਂ ਇੰਨੇ ਸਾਰਿਆਂ ਨੂੰ ਕੱਪੜੇ ਥਾੜ ਥੋੜ ਲੈ ਜਾਂਦਾ ਫਿਰ ਲੈ ਕੇ ਵੀ ਨਹੀਂ ਜਾਂਦਾ ਕਹਿੰਦਾ ਵੀ ਜਿਹੜਾ ਜਿਹੜਾ ਗਵਾਸਾਂ ਨਹੀਂ ਹੱਲੇ ਲੈ ਗੋ ਇਹ ਸਾਖੀ ਆ ਬੇਇੱਜ਼ਤੀ ਕੀਤੀ ਉਸ ਰਾਜੇ ਦੀ ਜਿਹਦੇ ਥਲੇ ਜਿੰਨਾ ਵਧੀਆ ਕੱਪੜਾ ਆ ਗਿਆ ਉਹਦਾ ਹੀ ਲੈ ਜਾਓ ਫੜ ਕੇ ਰਾਜੇ ਦੇ ਨ ਦੇਹੋਂ ਲੱਗੇ ਵੇਨ ਲਗਟਾ ਦੇਣਾ ਕਰ ਤੰ ਇਹ ਤਾਂ ਭਾਡੇ ਸੋਨੇ ਦੇ ਚਾਂਦੀ ਦੇ ਕਹਿੰਦੇ ਆਪਣੇ ਖਾਲ ਨੂੰ ਆ ਤਾਂ ਠੀਕੀ ਕਰਨਾ ਇਹ ਸਾਖੀ ਬਣਾਈ ਸਿਰ ਬੇਇੱਜ਼ਤੀ ਕਰਨ ਨੂੰ ਹੈ ਸਾਖੀ ਝੂਠੀ ਬਿਲਕੁਲ ਤਤ ਕੋਈ ਨਹੀਂ ਜੇ ਬੰਦ ਪੁਕਾਰ ਪੁਰਾਣ ਪੁਕਾਰ ਨਾ ਪਰਾਂ ਸਭ ਕੂੜ ਮੰਨੋ ਸਾਰੇ ਬੈਕਗ੍ਰਾਉਂਡ ਦਾ ਪਤਾ ਕਰਕੇ ਮੈਨੂੰ ਗੁਜਰਤ ਜੋ ਬੈਕਗ੍ਰਾਉਂਡ ਦਾ ਨਾ ਪਤਾ ਹੋਵੇ ਇਹਦਾ ਇਹ ਲੱਗਦਾ ਕਿਹੜੇ ਦਰ ਵਿੱਚ ਗੱਲ ਕੀਤੀ ਹੋਈ ਹੈ ਉਹਨਾਂ ਤੋਂ بڑے ਹੋਏ ਨੇ ਮੈਂ ਪੜ੍ਹ ਲੈ ਸੁਣਨੇ ਕਰਕੇ ਕੁਦਰਤੀ ਪਹਿਲਾਂ ਹਮਨੇ ਇਹ ਸੇ ਕਬੂਦੂ ਪੜ੍ਹ ਲੈ ਇਹ ਪੜ੍ਹਨ ਦਾ ਮੌਕਾ ਮਿਲ ਗਿਆ ਉਹ ਇੱਟਾ ਬਹੁਤ ਪਿਛਲੇ ਧਰਮਾਂ ਦੇ ਵਿੱਚ ਕੀ ਗੜਬੜ ਕੀਤੀ ਸੀ ਆਪ ਰਖਣ ਕੀਤੀ ਪਾਰ ਜਾ ਤੇ ਹਰ ਕੋ ਨਾ ਨਹੀਂ ਹੈ ਪਾਰ ਜਾ ਤੋਂ ਛੂਟ ਬੋਲੇ ਇਹਨਾਂ ਦਾ ਇੱਦਰ ਕੋ ਨਹੀਂ ਹੁੰਦਾ ਪਾਰ ਜਾ ਕੰਮ ਤੇ ਨਾਰ ਨਾਰ ਕੰਮ ਤਾਂ ਆਈ ਆ ਇਹੇ ਕੰਮ ਇਹਨਾਂ ਦਾ ਵਿਸ਼ਵਾਸ ਨਾ ਕਰਿਓ ਕੰਮ ਤੇ ਮਜ਼ਾ ਲੂਦਾ ਇਸ ਟ੍ਰਿਕ ਨਾਲ ਇਹਦਾ ਪ੍ਰਚਾਰ ਨਹੀਂ ਕਰ ਰਹੇ ਇਹ ਕੀ ਚਾਹ ਰਹੇ ਇਹਦਾ ਜੇ ਪਕੜਾ ਉਹਨਾਂ ਜੇ ਪ੍ਰਚਾਰ ਕਰ ਦੋ ਫਿਰ ਇਹ ਲਕੀਰ ਪੈ ਗਈ ਵਿਚਾਲੇ ਬਚਾ ਕਰਕੇ ਕਰਦੇ ਨਹੀਂ ਗੱਲ ਠੀਕ ਹੈ ਇਹਨਾਂ ਬਚਾ ਦੱਸ ਸਾਰੇ ਸਾਰੇ ਬਚਾ ਦੱਸਦਾ ਹਨੀ ਸਭ ਤੋਂ ਉੱਤਮ ਹਰ ਕੀ ਕਥਾ ਸਭ ਤੋਂ ਉੱਤਮ ਹਰ ਕੀ ਕਥਾ ਹਰ ਕੀ ਤੇਰਾ ਸਭ ਤੋਂ ਉੱਤਮ ਕਰਦੀ ਹੈਗਾ ਨਾਮ ਸੁਣ ਕੇ ਦਰਦ ਦੁੱਖ ਨਾ ਸਾ। ਕਿਉਂਕਿ ਨਾਮ ਛੁੱਟਦੀ ਸਾਰੇ ਤੋਂ ਦੁੱਖ ਦਰਦ ਖਤਮ ਹੋ ਜਾਂਦਾ। ਭਈ ਉਦੋਂ ਤੱਕ ਸੁਣਿਆ ਉਦੋਂ ਦੁੱਖ ਦਰਦ ਖਤਮ ਹੋਇਆ। ਜਿਹੜੀ ਕਥਾ ਦਾ ਨਾਮ ਸੁਣਨ ਨਾਲ ਗਿਆਨ ਸੁਣਨ ਨਾਲ ਦੁੱਖ ਦਰਦ ਖਤਮ ਹੋਵੇ ਉਹ ਹੋਰ ਕਥਾ ਕਿਹੜੀ ਚੱਲੀ ਹੋ ਸਕਦੀ ਹੈ ਵੀ। ਹੈ ਬਹੁਤ ਤਕੜੀ। ਸਭ ਤੋਂ ਉੱਤਮ ਅਰਥੀ ਕਥਾ ਕਿਉਂ? ਅਗਲੀ ਪੰਕਤੀ ਕਿੰਦਾ ਜਿਹਾ ਵਾ ਕਹਣੇ ਕਾਰਨ ਨਾਮ ਸੁਣਦਾ ਜੀ ਸਾਹਿਬ ਨਾ ਤਦ ਦੁੱਖ ਨਤਾ ਇਦਾਂ ਦੀਵਾ ਬੜਿਆ ਤੇਰਾ ਗਿਆ ਇੰਨਾ ਐਕਸ਼ਨ ਹੈ ਰੈਪ੍ਰੇਡਿਕਸ਼ਨ ਹੈ ਇਹੋ ਧੋਮ ਦਾ ਤਸੋ ਗੜੀ ਜੀਤ ਹੈ ਫਿਰ ਇਹੋ ਮਾਰਾ ਠਾਸੀ ਦਾ ਉਹ ਕਹਿੰਦਾ ਸਾਲ ਮਾਰਾ ਬੇਲੀਏ ਤਾਂ ਵੀ ਸਾਨੂੰ ਉਗੜਿਆ ਮੈਂ ਨਾਲ ਸੁਆਸੀ ਕਰਨ ਮੈਂ ਮੜਾਣੀ ਸੀ ਜੇ ਮੈਂ ਰਾਹ ਰਾਜਾਂ ਤੇ ਉਸੇ ਮਿਲਦਾ ਮੈਂ ਨਾਲੇ ਰਾਹ ਜੀ ਪਾਇਆ ਕੋਸੀ ਆਪਾ ਤੇ ਗੱਲ ਕਹਿ ਕੇ ਮਖਾੜਣੀਆਂ ਗੱਲ ਕਿ ਭਾਈ ਉਹ ਤਾਂ ਬੁੱਢੇ ਦੇ ਨਹੀਂ ਮਿਲਿਆ ਮੈਂ ਨਾਲੇ ਰਾਹ ਜੀ ਮੈਂ ਬੜੂ ਜਾਂਦਾ ਮੈਂ ਰਾਹੀ ਸੀ ਰਾਹ ਬੰਦੇ ਦਾ ਮਿਲਦਾ ਆ ਰਾਹ ਜਿਹੜੇ ਗਏ ਨੇ ਬੜ ਗਿਆ ਬੰਦੀ ਦਾਸ ਬੜ ਬੈਠੇ ਨੇ ਸਿਰ ਧਿਆਰਾ ਚੱਲਦਾ ਨਾ ਉਹ ਸਰੋਤ ਦਾ ਦੁੱਖ ਨਾ ਦੋ ਹੈ ਕਿ ਨਹੀਂ ਸਾਦ ਕੀ ਕਰ ਨਹੀਂ ਕੀਤਾ ਇਹ ਕਾਰਨ ਸੀ ਅਗਰ ਨੇ ਕਿਹਾ ਸਵਤ ਕਰਕੇ ਦਿਖਾਓ ਕਿ ਨਾ ਸਵਤ ਕਰਦੇ ਆਂ ਨਾਮ ਕੀ ਮਹਿਮਾ ਸੰਤ ਰਿਤ ਬਸੇ ਮਾਮ ਧਰਮ ਦੇ ਕਿੱਥੇ ਬਸਦੀ ਹੈ ਸੰਤ ਬਸੇ ਸੰਤ ਹਿਰਦੇ ਚ ਰੁਟੋੜੀ ਹੈ ਮਾਮ ਉਹਦੇ ਹਿਰਦੇ ਚ ਬਸਦੀ ਹੈ ਜਿੱਥੇ ਕੋਈ ਜੀ ਵਸੂ ਉੱਥੇ ਮਿਲੂ ਉੱਥੇ ਬਾਹਰ ਆਉ ਸੰਤਰੇ ਦੇ ਵਸੇ ਸੰਤ ਪ੍ਰਤਾਪ ਦੁਖਤ ਸਭ ਨਸੇ ਕਿਉਂ ਕਹੀਏ ਰੋਕ ਕੀ ਬਸ ਸੰਤਰੇ ਦੇ ਵਸੇ ਨਹੀਂ ਜਰਾਂ ਤਾਂ ਲਿਖੀ ਹੁੰਦੀ ਜੇ ਉਹ ਜਦੋਂ ਮੈਨੂੰ ਕਹਿੰਦਾ ਕਿਥੇ ਲਿਖਿਆ ਕਿਤਾਬਾਂ ਮੇਰੇ ਦਰਖੀਆਂ ਹੁੰਦੀਆਂ ਨੇ ਆਂ ਜਵਾਬ ਦਿੱਤਾ ਸੀ ਸੁਣੀ ਜਾਵੇ ਕਿ ਭਾਈ ਜਨਾਜ਼ਾ ਤੇਰੀ ਜ਼ਿੰਦਗੀ ਤੂੰ ਸੁਣੀ ਜਾ ਰੋਜ ਫਿਰ ਇਹਨੂੰ ਪਤਾ ਨੂੰ ਬੁੱਕ ਨੂੰ ਬੁਲ ਗਿਆ ਹੈ ਇਹ ਕਿਤਾਬ ਦਾ ਮੁੱਕ ਜੂਗੀ ਖਿਦਾਉ ਕੇ ਨਾਲ ਜਦ ਜਲੂਗੀ ਉਹ ਬੁੱਕ ਜੂ ਜਦੋਂ ਮੁੱਕ ਗਿਆ ਉਹ ਤਾਂ ਦੱਸਦੀ ਆਦਾ ਸੀ ਤਾਂ ਕੋ ਰਹੀ ਸੀ ਵਿਦਾਂਤੀ ਨੇ ਇਹਨਾਂ ਜੋ ਬਗੜ ਕੇ ਵਜਾ ਰਾਂ ਟੋਹਨ ਨੂੰ ਦੀ ਬਦਗਲ ਕੀ ਹੈ ਹਾਂਜੀ ਸੰਤ ਦਾ ਸੰਗਗੁੜ ਭਾਗੀ ਪਾਈ ਹੈ ਮੇਰੇ ਨਾਲ ਉਹ ਸੀ ਉਹ ਸਾਡੇ ਨਾਲ ਉੱਧਰ ਉਹ ਸੀਗਾ ਆਪਣਾ ਗੁਰਚੰਦ ਅੰਦਰ ਬੈਠੇ ਸੀ ਜੇ ਉੱਥੇ ਰੋਟੀ ਖਾਧੀ ਹੋਤਨ ਉਹ ਉਹਦੇ ਵਿੱਚ ਆਪਣੇ ਹਾਂ ਅੰਦਰ ਸੁਗਤਲੇ ਗਿਆ ਸੱਤਰੇ ਇੱਧਰ ਦਾਲ ਬੈਠਿਆ ਬਰਾਬਰ ਦੇ ਬੈਠੀ ਸੀ ਕੜਾਪਗਨ ਆ ਐਵੇਂ ਨਾਲ ਜੀ ਦਾ ਵੀ ਕੜਾਪਗਨ ਨਾਲ ਰਿਸ਼ਤੇ ਨਹੀਂ ਬਾਰੇ ਨਹੀਂ ਦਾਤੀ ਸੀ ਨਹੀਂ ਆ ਉਹ ਗੱਲਾਂ ਕੀਤੀ ਬਾਰੇ ਦਾਤੀ ਟੀਕੇ ਉਹਨੇ ਰੱਦ ਕਰੇ ਦਿੱਤੇ ਸੌਖਾ ਤਾਂ ਨਹੀਂ ਆ ਬੱਚੇ ਪਿੰਡ ਵਾਲਿਆਂ ਦਾ ਟੀਕਾ ਵੀ ਤਾਂ ਰੱਦ ਹੁੰਦਾ ਹੀ ਆ ਹੁਣ ਉਹ ਕਹਿੰਦੇ ਨੇ ਮਹਾਪੁਰਸ਼ ਸਾਡੇ ਉਹਨਾਂ ਨੇ ਕਿਹਾ ਕਹਿੰਦੇ ਭਾਈ ਪਿੰਡ ਵਾਲਿਆਂ ਨੇ ਆਂ ਦਾ ਪੜਾਇਆ ਹੋਇਆ ਜਬ ਜੀ ਨੇ ਰੱਦ ਕੀਤਾ ਅੱਗੇ ਹੀ ਕਰਦੋ ਜਿਹੜਾ ਰੱਦ ਕੀਤਾ ਤਾਂ ਤੁਹਾਡੇ ਸੂਣ ਨਾਲ ਸੀ ਇਹ ਉੱਤੇ ਪੱਟੀਆਂ ਪੜਿਆ ਹੋਇਆ ਹੈ ਉਹ ਕਾਲ ਕਰਦਾ ਉਹੀ ਜਿਹਦਾ ਸੀ ਉਸਨੇ ਰੱਦ ਕੀਤਾ ਵਧੀਆ ਕੀਤਾ ਉੱਤੇ ਕਰਵਾ ਲਿਆ ਨਾ ਮੇਰਾ ਜਦ ਦਰਿਆਣਾ ਨੇ ਸਵਾਨ ਚੁੱਪਦੇ ਰਹਿਣਾ ਸੀ ਸਭ ਤੇ ਪਿੰਡ ਵਾਲਿਆਂ ਨੇ ਹਾਂਜੀ ਸੰਤ ਦਾ ਸੰਗਬੜ ਭਾਗੀ ਪਾਈ ਹੈ ਸੰਤ ਦੀ ਸੇਵਾ ਨਾਮ ਤੇ ਆਈ ਹੈ ਸੰਤ ਦਾ ਸੰਗਬੜ ਪਾਈ ਹੈ ਸੰਤ ਤਾਂ ਸੰਤ ਦੇ ਨਾਮ ਕੀ ਮਹਿਮਾ ਸੰਤ ਦੇ ਤਰ ਬਸੇ ਸੰਤ ਪ੍ਰਤਾਪ ਦੁਰਤ ਸਭ ਨਸੇ ਔਰ ਸਤ ਪ੍ਰਤਾਪ ਦੁਰਤ ਸਭ ਸਪਨਾ ਸਾਰ ਸੰਤ ਜਿਹੜਾ ਦਲਵ ਆ ਹਣੇ ਜਿਹੜੇ ਸੰਤ ਦੇ ਦੇ ਵਿੱਚੇ ਪਸ ਚਲਦੀ ਹੈ ਦੁਰਤ ਸਭ ਕੁਝ ਰਹਿ ਹੈ ਦੁਰਤ ਸਭ ਨਸੇ ਮਨ ਤੇ ਜਿਹਨੀ ਬਸਣੀ ਹੈ ਸੰਤ ਦੇ ਤਰ ਹੈ ਬੰਨਣੀਆਂ ਗੱਲੇ ਨਹੀਂ ਆ ਹੈ ਮਾਨ ਨਹੀਂ ਬਨਣੀ ਆ। ਬਾਤੇ ਲਾਪਰਵਾਹੀ ਕਰਕੇ ਬਾਣੀ ਬਨਣੀ ਪਾਣੀ ਆ। ਅੰਦਰਲੇ ਨੂੰ ਬਣਾਉਣਾ, ਬਾਹਰ ਨੂੰ ਬਲੋੜੀ ਲੋੜ ਹੈ। ਬਾਹਰ ਦੀ ਅਕਲ ਸਾਥ ਦੇਣ ਤੇ ਸ਼ਬਦ ਬਜਣਗੇ, ਅੰਦਰੋਂ ਦੇ ਪਿਛੇੜੀ ਜਾਊਗਾ, ਅੱਗੇ ਜਾਊਗਾ। ਉਹ ਤਾਂ ਫਿਰ ਬਾਹਰਲਾ ਜਨਾਬ ਹੀ ਮੰਨੂਗਾ, ਉਹ ਤਾਂ ਫਿਰ ਮਤ ਕੋਈ ਮੰਨਣ ਦਾ ਨਮਾਜ਼। ਤੇ ਜੇ ਫੈਸਲਾ ਕਰਨ ਉਦਣ ਹੈ। ਸੰਤ ਦਾ ਸੰਗ ਬੜ ਭਾਗੀ ਪਾਈ ਐ ਸੰਤ ਦਾ ਸੰਗ ਬੜ ਭਾਗੀ ਪਾਈ ਐ ਸੰਤ ਦਾ ਜਿਹੜਾ ਸੰਗ ਹੈ ਬੜੇ ਭਾਗਾ ਕਰਕੇ ਮਿਲਦਾ ਇਹ ਸੰਗ ਬਾਦ ਨਦੀ ਗੱਲ ਆ ਅਦਲ ਨਹੀਂ ਅਦਲ ਦਾ ਹੈ ਕੋਈ ਸੰਗ ਦਾ ਨੂੰ ਪਤਾ ਨਹੀਂ ਇਤਨਾ ਤਾਂ ਨਾਲ ਇਹ ਪਤਾ ਉਹਦਾ ਉਹਦਾ ਗਿਆਨ ਹੈ ਨਹੀਂ ਸਾਨੂੰ ਕੁਦਾ ਨਾਲ ਹੀ ਹੈ ਅਸੀਂ ਆ ਬਾਹਰ ਨੂੰ ਜਾਗਦੇ ਆ ਕੁਦਾ ਸਿਰਫ ਇਹਨੂੰ ਕੁੱਬੜ ਦੇ ਵੱਲ ਸੀ ਕੋਈ ਜੱਲ ਨਹੀਂ ਕੋਈ ਜੱਲ ਨਹੀਂ ਤੇ ਅਗਲੀ ਸੰਗੋਜੀ ਸੰਤ ਦਾ ਸੰਗਬੜ ਭੱਗੀ ਪਾਈ ਹੈ ਸੰਤ ਕੀ ਸੇਵਾ ਨਾਮ ਤੇ ਆਈ ਹੈ ਸੰਤ ਕੀ ਸੇਵਾ ਨਾਮ ਤੇ ਆਈ ਹੈ ਸੰਤ ਕੀ ਸੇਵਾ ਕੀ ਹੈ ਨਾਮ ਲੈ ਕੇ ਚੱਲਣਾ ਉਹ ਹੁਕਮ ਜਿਤੇ ਆਣਾ ਹੁਕਮ ਜਿਤੇ ਹੋ ਰਿਹਾ ਜੋ ਹੋ ਰਿਹਾ ਉਹ ਵੀ ਆਪਾਂ ਕਰਨਾ ਕੋਈ ਨਹੀਂ ਧਿਆਨ ਰੱਖਣਾ ਉਹ ਕਾਲਾ ਧਿਆਨ ਰੱਖਾ ਜੋ ਕੀ ਹੁਕਮ ਉਹ ਤਾਂ ਉਹ ਵੀ ਸਾਨੂੰ ਕੀ ਹੁੰਦਾ ਹਰਦਾਨ ਗਾਦਾ ਜਿਵੇਂ ਬੜਾ ਸੀ ਨਾ ਆਪਣੇ ਕੋਲ ਨਹੀਂ ਤਾਂ ਰੱਖਣਾ ਉਹਨੂੰ ਕੀ ਆਵਾਜ਼ ਕੱਢੀ ਹੈ ਉਹ ਕੋਈ ਤਾਂ ਅਦਰ ਹੁੰਦੇ ਹੀ ਨੇ ਰਾਤ ਜਿਹੜੇ ਵਕੀਲ ਪੇਸ਼ ਹੁੰਦੇ ਨੇ ਉੱਥੇ ਕਈਆਂ ਨੂੰ ਕਹਿ ਜਾਂਦੇ ਆ ਨੂੰ ਕਹਿ ਜਾਂਦੇ ਕੁਝ ਉਹ ਸਾਨੂੰ ਕਹਿ ਜਾਂਦਾ ਸਵਾਲ ਤਾਂ ਇਹ ਆ ਉਹ ਤਾਂ ਸਾਰੇ ਨੂੰ ਹੁੰਦਾ ਹਕੂ ਦਾ ਭਾਵੇਂ ਵਿੱਚ ਸੋਚ ਭਾਵੇਂ ਵਿੱਚ ਚੰਦ ਕੋ ਕਰੋੜੀ ਤੇ ਅੱਡਾ ਕੀ ਹੈ ਉਧਰ ਚ ਅਸੀਂ ਕੀ ਕਰਨਾ ਅਸੀਂ ਆਪਣਾ ਧਿਆਨ ਰੱਖਣਾ ਆਪਣੇ ਬਾਰੇ ਚੱਲਣਾ ਸਤਿਗੁਰ ਸਤਿਗੁਰ ਤੇ ਨਾਮ ਪਾਇਆ ਜਾਣਾ ਨਾ ਉਹ ਕੋਮ ਉਹ ਕੋਮ ਦਾ ਮੈਸੇਜ ਸਤਿਗੁਰ ਥਰੂ ਹੈ ਹੁਣ ਉਹ ਧਿਆਨ ਰੱਖੋ ਸੰਤ ਕੀ ਸੇਵਾ ਨਾਮ ਜਿਹੜਾ ਅੰਦਰ ਚਿਤਰਾ ਫੁਰਨਾ ਨਾ ਉੱਦਮ ਕਰਨੇ ਕਰਾਓ ਸਤਗੁਰ ਉਦਮ ਇਹ ਨਾ ਕਹਤਾਂ ਤਾਂ ਵੀ ਸਤਗੁਰ ਕਰਾਉਂਦਾ ਤਾਂ ਕਰ ਦੋ ਉਹ ਫੁਰਨਾ ਤੇ ਪਿੱਛਾ ਪਿੱਛਾ ਚੋੜੂ ਨੂੰ ਜਾਨਣੇ ਤੇ ਅਨਕੰਨ ਗੱਲਾਂ ਤਾਂ ਨਹੀਂ ਵੀ ਇਹ ਤਾਂ ਮੈਂ ਦੋ ਤਰ੍ਹਾਂ ਮੰਨਦਾ ਵੀ ਹੁਕਮ ਵਿੱਚ ਧਿਆਨ ਰੱਖਣ ਨੂੰ ਨਹੀਂ ਉਹ ਆਇਗਾ ਵੀ ਯਾਨੀ ਕਈ ਵਾਰ ਬੋਲ ਬੰਦਦਾ ਹੈ ਇਹ ਕਰ ਲੀਏ ਉਹ ਗੱਲ ਇਹ ਹਰ ਵਕਤ ਪਾਈ ਨਹੀਂ ਹੁੰਦਾ ਉਹ ਪਿਛੋਂ ਹੁੰਦਾ ਜੇ ਪਿਛੋਂ ਹੁੰਦਾ ਤਾਂ ਸਾਰੇ ਵੀ ਅਪਝੜ ਜਾਂਦੇ ਤਾ ਕਿ ਭਈ ਆਪੇ ਆਪਾਂ ਕਹਿੰਦੇ ਆ ਵੀ ਜੇ ਆਪਾਂ ਉਹ ਖੋਜਵੇ ਤਾਂ ਠੀਕ ਹੈ ਪਰ ਹੋਜਵੇ ਦੇ ਵਿੱਚ ਅਸੀਂ ਕਾਲੇ ਪੈਣ ਦੀ ਲੋੜ ਕਾਲੇ ਪੈਣ ਦਾ ਸਾਡਾ ਹੁਕਮ ਹੈ ਜੇ ਉਹਦੇ ਸਾਹਬ ਨਾਲ ਚਾਹੁੰਦੇ ਬਹੁਤ ਸੂਟੇ ਚਾਹੁੰਦੇ ਅਸੀਂ ਜਦੋਂ ਬੈਠੇ ਗੱਲ ਕਰੇ ਹਾਂ ਹੈ ਉਹ ਤਾਂ ਸੱਚ ਹੁੰਦਾ ਹੁਣ ਬੱਸ ਇਹਨੂੰ ਦਾਲ ਝੋਲ ਕੇ ਭਰੇ ਕਰਿਆ ਅਸੀਂ ਮੇਲੇ ਹੋਈ ਨਹੀਂ ਸਕੀਮਾਂ ਆਪੇ ਬਣਾ ਕੇ ਆਪੇ ਤਾਂ ਤਾਂ ਆ ਆਪ ਬਣਾ ਕੇ ਆਪ ਹੀ ਤਾਂ ਸੰਤ ਦਾ ਸੰਗ ਬਟ ਭਾਗੀ ਪਾਈ ਹੈ ਸਤ ਕੀ ਸੇਵਾ ਨਾਮ ਤੇ ਆਈ ਹੈ ਸਤ ਕੀ ਸੇਵਾ ਨਾਮ ਤੇ ਆਈ ਹੈ ਸਤ ਕੀ ਸੇਵਾ ਕੀ ਹੈ ਨਾਮ ਦੇ ਵਿੱਚ ਹੰਟਾ ਕਿਉਂ ਤੂੰ ਚਲਾਇ ਤੇ ਮੈਂ ਚੱਲਾਂ ਥੋਪੀਆਂ ਨਾ ਔਰ ਕਹਿ ਰਾਮਲਪੁਰ ਤੇਰੇ ਇਹ ਲੋਕ ਤੇ ਆ ਨਾਮ ਨੇ ਵਿੱਚ ਹੰਟ ਵਿਜੈ ਜਾਂਦਾ ਨਾਮ ਦਾ ਪ੍ਰਚਾਰ ਨਾਮ ਦੀ ਮਤਲਬ ਹੈ ਕੰਦੀ ਕਲਾ ਇੱਥੇ ਆਣੀ ਹੈ ਨਾ ਨਾ ਉੱਤੇ ਹੋਣਾ ਠਾਕਾ ਉੱਤੇ ਹੋਣਾ ਇਹੀ ਹੈ ਤੇ ਆਹਨੋ ਦੀ ਬਿਹਤਰੀ ਵਾ ਡਾਕਟਰ ਤੇ ਆਂ ਕਰਦਾ ਬਰੀਦ ਤੇ ਇਹਦਾ ਕਾਲੇ ਵਾਸਤੇ ਕਰਦਾ ਦੇਖਦਾ ਵੀ ਕਿੰਨਾ ਜੀਨੂ ਹੈ ਇਹੋ ਤੇ ਅਦਾ ਤੇ ਆਈਏ ਤੇ ਵੀ ਕਹੀ ਉਹਦੀ ਬਿਹਤਰੀ ਕਈ ਐਂਡਲ ਤੋਂ ਤੇ ਆਈਏ ਤੇ ਅਸੀਂ ਆਤ ਨਵਾਗੇ ਕਈ ਦੇ ਆਖਦੇ ਕਿਵੇਂ ਦੂਰ ਬੜੇ ਬਣ ਕੇ ਸੱਚ ਉੱਪਰ ਆਵੇ ਹਾਂ ਇਹ ਗੱਲ ਦਾ ਧਿਆਨ ਰੱਖੋ ਨਾਮ ਤੋਂ ਕੁਛ ਅਵਰ ਨਾ ਹੋਏ ਨਾਨਕ ਗੁਰੂ ਕੀ ਨਾਮ ਪਾਵੇ ਜਨ ਕੋਈ ਨਾਮ ਤੋਂ ਕੁਛ ਅਵਰ ਨਾ ਹੋਵੇ ਨਾਮ ਦੇ ਬਰਾਬਰੀ ਹੋਤਾ ਕੋਈ ਚੀਜ਼ ਹੈ ਨਹੀਂ ਸੰਸਾਰ ਝੋਲੀ ਚੱਕਦੀ ਹੋਇਆ ਹੀ ਦੀ ਗੱਦੇ ਨਾ ਕਹਾ ਹੂਗਾ ਹੋਏ ਹੈ ਹੋਏ ਤੇ ਕੁਛਰ ਵਾਸਤੇ ਉਸ ਬੇੜੇ ਆ ਫਿਰ ਚੱਤੀ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਹੁੰਦੀ ਉਹ ਤਾਂ ਨਾ ਹੋ ਸਕਦੀ ਜਦ ਤੱਕ ਨਾਨਕ ਗੁਰੂ ਨਾਮ ਪਾਵੇ ਕੋਈ ਇਸ ਕਰਕੇ ਨਾਨਕ ਕਹਿੰਦਾ ਗੁਰਮੁਖੀ ਕੋਈ ਬੰਦਾ ਨਾ ਜਿਹੜਾ ਹੈ ਨਾਮ ਦੀ ਪ੍ਰਾਪਤੀ ਕਰਦਾ ਕਿਉਂਕਿ ਨਾਮ ਦੇ ਬਰਾਬਰ ਕੋਈ ਵਸਤੂ ਹੈ ਨਹੀਂ ਇਸ ਕਰਕੇ ਇਹਦੀ ਪ੍ਰਾਪਤੀ ਵੀ ਕੋਈ ਹੋ ਰਹੀ ਜਾਂਦਾ ਜਦੋਂ ਕਰ ਲੈਦਾ ਜਿਹੜਾ ਪ੍ਰਾਪਤੀ ਫਿਰ ਉਹਦੇ ਤੁਲ ਕੋਈ ਰਹਿਣਾ ਨਹੀਂ ਹੋ